बीज मंत्र सर्व को ज्ञान चार नाम चौ बरना में जबे ना, को ना बीज मंत्र सर्व को ज्ञान सर्व को ज्ञान देने वाला बीज बुद्धर है सबों ज्ञान तेरा सीरा जो दुनिया का ज्ञान दाता वो बीज बुद्धर वो बिना गाना दे सुन वाली वाणी बीज मंत्र है बिना गाना दे सुन वाली वाणी ਉਹ ਕਮਾਂ ਜਦਾਂ ਹੋਦੀ ਉਹ ਬੀਜ ਮੰਤਰ ਹੈ ਪੈ ਵਿੱਚ ਜਿਹੜੀ ਉਹਦੀ ਪਾਇਆ ਬੀਜ ਮੰਤਰ ਉਹ ਚ ਪੈ ਵਿੱਚ ਪવન ਵਾਹ ਸਦ ਉਹ ਬੀਜ ਮੰਤਰ ਤਾਂ ਨਹੀਂ ਪੈ ਵਿੱਚ ਚੱਲਣਾ ਲੱਕ ਪੈ ਵਿੱਚ ਅਗਨ ਕੱਢਾ ਬੇਗਾਰ ਪੈ ਵਿੱਚ ਧਤੀ ਦੱਪੀ ਪਾਰ ਚਾਰੇ ਤਤਾਂ ਦੀ ਜਿਆਦਾ ਹੋ ਗਿਆ ਸਾਰੀ ਇਹਦੇ ਵਿੱਚ ਜਿਆਦਾ ਪਾਵਿਚੇ ਤੂਰ ਜੇ ਪਾਵਿਚੇ ਚੰਦ ਉਸੂਰ ਚੰਦ ਕੇ ਸਰਮਾਨਾ ਹੋ ਗਿਆ ਬਾਹਲੇ ਵੀ ਆ ਕੇ ਚਲੋ ਉਹ ਕਰੋੜੀ ਚਲਤਨਾ ਇਸ ਕਰਕੇ ਉਹ ਜਿਹੜਾ ਬੀਜ ਮੰਤਰ ਹੈ ਉਹ ਪੜਿਆ ਉਹਦੇ ਕੰਟਰੋਲ ਤੇ ਨੇ ਸਾਰੇ ਸਰਬ ਗਿਆਨ ਸੂਈ ਦਾ ਰਸਤਾ ਨਿਹਾਰ ਕੀਤਾ ਹੋਇਆ ਵੀ ਐਸਾ ਤੀ ਜਾਣਾ ਹੈ ਜਹਾਸੰਗਾ ਦੁਨੀਆ ਤੋਂ ਜਾਂ ਤੱਕ ਤੱਕ ਫਿਰ ਤੇ ਚੱਲਣਾ ਇਹ ਏਰੀਆ ਦੀ ਹੁਣੇ ਕੋਹ ਪਰੇ ਨਹੀਂ ਜਾਣਾ ਢੜੋਲੋ ਜੀ ਵੀ ਪਰੇ ਤਾਂ ਸੱਚ ਕੀਤਾ ਹੋਇਆ ਹੈ। ਹਾਂ ਜੀਜ ਮੰਤਰ ਸਰਬ ਕੋ ਗਿਆਨ ਕਿਉਂ ਵਰਨਾਵੇਂ ਜਪੇ ਕੋ ਨਾ। ਚਾਹ ਮੰਨਾਂਵੇਂ ਜਪੇ ਕੋ ਨਾਮ ਕੋਈ ਜਪੇ। ਇਸ ਕਰਕੇ ਜੇ ਸਰਬ ਗਿਆਨ ਦਿੱਤਾ ਵੀਜ ਗੁਰੂ ਦਾ ਇਹਦਾ ਬੀਜ ਮੰਤਰ ਹੈ ਨਾ ਜਿਹੜੀ ਅਸਰਾਧਵਨ ਇਹ ਵਾਜਾ ਬੀਜ ਮੰਤਰ ਹੈ। ਕਦ ਸਾਰਿਆਂ ਨੇ ਮਰੀ ਅਫਤ ਜਵਾ ਵੀ ਅਬ ਤਰੈ ਦਾ ਵੀ ਸਾਰਿਆਂ ਨੇ ਅਸਰ ਹੈ ਕਿਉਂ ਕਰਨਾ ਜੇ ਕੋ ਅੰਤਰਾਦਵਨੀ ਵਾਏ ਸਾਰਿਆਂ ਦੇ ਅੰਦਰ ਇੱਕੋ ਹੀ ਆਵਾਜ਼ ਹੈ ਆਪ ਕੋਈ ਅਪਲਵੇ ਨਾਮ ਜਪੜਦੇ ਤੋਂ ਕਿਸ ਵੇਸ ਤੇ ਲਈ ਹੋਇਆ ਆ ਮਤਲਬ ਆ ਜਦ ਪਰਮੇਸ਼ਰ ਨੇ ਉਹ ਜਿਹੜੀ ਜੀ ਇੰਤਿਆਜ਼ ਕਰੇ ਤਾਂ ਮਨ ਸਭ ਦੇ ਅੰਦਰ ਵੀ ਜੀ ਪਾਇਆ ਹੋਇਆ ਹੈ ਰੁੱਖਾਂ ਨੂੰ ਖਾਣੇ ਦੀ ਜੇ ਆਪਾਂ ਗੱਲ ਕਰੀਏ ਬਾਕੀ ਪਾਇਦਾ ਸਾਰੇ ਜੀਵਾਂ ਦੇ ਆਪਾਂ ਚਲ ਆਸਮਾਨ ਦੀ ਗੱਲ ਕਰ ਲੈਂਦੇ ਹਾਂ ਕਿ ਪਵੰਦੇ ਅਸੀਂ ਆਸਮਾਨ ਤੇ ਲਾਈ ਜਾਵੋ ਆ ਨਾਸਮਾਨ ਤੇ ਬਣਾਇਨਾ ਕੱਲਿਆਂ ਦੇ ਬੱਲੇ ਬੜਨਾ ਆਸਮਾਨ ਦੀ ਗੱਲ ਦਾ ਨਾਮ ਜਪਣਾ ਆਸਮਾਨ ਤੇ ਪੱਲੇ ਆ ਬਾਕੀ ਦੰਗਰ ਦਾ ਹੈ ਨਹੀਂ ਪਛੂਪ ਜਨ ਰਹੇ ਨਹੀਂ ਜੇ ਆ ਬੜਨਾ ਮੈਂ ਫਿਰ ਕੋਈ ਜਪੇ ਨਾ ਫਿਰ ਤੁਪਤੀ ਗੱਲ ਹੈ ਜਬੀਜਵੰਤ ਨੂੰ ਸਭ ਕੋ ਗਿਆਨ ਦੇਣ ਵਾਸਤੇ ਸਾਰੇ ਅੰਨਸਤ ਪਰਮੇਸ਼ਰ ਨੇ ਭਾਗੇ ਕੱਲੇ ਆਏ ਤੁਸੀਂ ពਗਤੀ ਕਿਵੇਂ ਲਈ ਚਾਰ ਵਰਣ ਕਿਵੇਂ ਮਾਰੇ ਥੋੜੋ ਤੋਂ ਗ੍ਰਾਉਂਡ ਕੀਆ ਆ ਗੱਲ ਹੈ ਜਵਾਬ ਦੇਓ ਜਵਾਬ ਉਹਨਾਂ ਤੋਂ ਕੀ ਪੰਡਤਾਂ ਦੇ ਜੇ ਪੰਡਤ ਇੰਨਾ ਖਵਾਸਾ ਕਰੂਦੇ ਇਹ ਗੱਲ ਦਾ ਕੱਟ ਕੇ ਫੜ ਕੇ ਬਾਹਰ ਕਰਦੇ ਤਾਂ ਕੋਈ ਨਾ ਅੱਜ ਕਰਨਾ ਤੇ ਮੈਂ ਕਰਨ ਹੋ ਗਿਆ ਜੀ ਉਹ ਰੱਬ ਕੋ ਤੁਮ ਦਾ ਨਾਮ ਲੇ ਇਹ ਗੱਲਾਂ ਲਿਖੋਣੀਆਂ ਸਿਉਨ ਐ ਇਹ ਗੱਲਾਂ ਲਿਖਣ ਦੇ ਪੈਸੇ ਮਿਲੇ ਸਿਉਨ ਇਹ ਆ ਗੱਲਾਂ ਨਹੀਂ ਕਰਦੀ ਹਾਇ ਫ੍ਰੀਕ ਨੇ ਇਹ ਤਾਂ ਲਿਖੋਣ ਦੇ ਤਾਂ ਆਖਾਖਾ ਲਿਖੋਣ ਦੇ ਪੈਸੇ ਜੀ ਹਾਂ ਜੋ ਜੋ ਜਪੇ ਤਿਸੀ ਗਦੀ ਹੋਏ ਸਾਧ ਸੰਗ ਪਾਵੇ ਜਨਮ ਜੋ ਜੋ ਜਪਾ ਕੌਣ ਜਪਾ ਆਗਾ ਫਲਾਂ ਜਿਹੜਾ ਮਜੀ ਜਪਤ ਦੇ ਉਹਨਾਂ ਨੇ ਸਪ੍ਰਤੀਆਂ ਦੇ ਵਿੱਚ ਲਿਖਿਆ ਸੀ ਕੋਈ ਜਿਹੜਾ ਬੀਜ ਨਾਮ ਜਗੂ ਉਹਨੂੰ ਫੜ ਲੈਣਗਾ ਦੇ ਜਿਹੜਾ ਜੰਮਦਾ ਆਊਗਾ ਪੇੜ ਜਨੂ ਪਦਾਵਤਾ ਰਹੇਗਾ ਉਹਨੂੰ ਫੜ ਲੈਣਗਾ ਨਾ ਬੀਜ ਜੇ ਸੰਤੋਖੀ ਵੀ ਹੋਊਗਾ ਨਾਲ ਗੁਰ ਸੰਤੋਖ ਨੂੰ ਖਾ ਕਰਮ ਫੁੱਲ ਕਰਮਤੀ ਪੂਰਾ ਹੋ ਉੱਭਦਿਆ ਜੂ ਪਰ ਜਾਨ ਦਾ ਫੜ ਨਹੀਂ ਲੱਗਣਾ ਆਹ ਦੇਖੋ ਹਾਂ ਨਹੀਂ ਗਲਤੀ ਗੱਲ ਕੀ ਹੈ ਉਹਨੂੰ ਫੜ ਨਹੀਂ ਲੱਗਣਾ ਸੰਤੋਖ ਹੋ ਜਾਊਗਾ ਫੜ ਨਹੀਂ ਲੱਗਣਾ ਗਿਆਨ ਨਹੀਂ ਕਰਾ ਸਕਦਾ ਉਹ ਗਿਆਨ ਕਰਾ ਕੇ ਦਿਖਾਇਆ ਰੱਬ ਦਾ ਸਵਰਗ ਵੀ ਕਿਉਂ ਆ ਨਾਮ ਦੇਵ ਤੋਂ ਯਾਦ ਖੋਇਆ ਹੋਇਆ ਉਹਦਾ ਤੋਂ ਜੀਵਾਗਰ ਜਿਨਾਂ ਜਿਹੜੇ ਇਹਨਾਂ ਤੋਂ ਗਿਆ ਨਹੀਂ ਕਰਵਾਇਆ ਉਹਨਾਂ ਦੀਆਂ ਸਮਰੱਥੀਆਂ ਸੱਚੀਆਂ ਜਿਨਾਂ ਅger ਕੋਈ ਫਕਤ ਨੂੰ ਫਾਇਦਾ ਹੋਇਆ ਨਹੀਂ ਜਾਤੀਆਂ ਜੋ ਜਿਹੜੀਆਂ ਨਾ ਕਿ ਬੜਾਈਆਂ ਹੋਈਆਂ ਅਸੀਂ ਆਡੇ ਘਰ ਤਾਂ ਦੂਜੇ ਕੋਈ ਹੈ ਨਹੀਂ ਉਹਨਾਂ ਦੀ ਭਾਸ਼ਾ ਦੇ ਮਤਲਬ ਉਹ ਜਿਹੜੇ ਨਹੀਂ ਜੀ ਉਹਨਾਂ ਦੇ ਭਗਤ ਪੈਦਾ ਕਰਤੇ ਜਦ ਫਿਰ ਕਹਿਣ ਨੂੰ ਕੁਝ ਨਹੀਂ ਹੋ ਗਿਆ ਨਾ ਲਾਜਵਾਬ ਪਰਮੈਸ਼ਰ ਨੇ ਪੈਦਾ ਕਰਤੇ ਹਾਂ ਫਿਰ ਬੋਲੋ ਕੀ ਬੋਲਦੇ ਜੋ ਹੂਜੇ ਹੋਵੇ ਆਦਮਨ ਕੋ ਆਸੀ ਕਿਉਂਗਾ ਯਾ ਦੇਖੋ ਅਜਿਲਾਹ ਹੈ ਅਜਮਾਰ ਹੈ ਹੁਣ ਕਹਿਣਾ ਵੀ ਠੋਕ ਗਿਆ ਪਹਿਰ ਅਰਦਾਸ ਚਾਰਾ ਜਮਰਸਾ ਗਾਂਢ ਹੋਣੀ ਜਾਂਦੀ ਜਾਣਦੇ ਰਹਿੰਦੇ ਸੋ ਉਹ ਜੋ ਕਹਿੰਦੇ ਹੋ ਨਹੀਂ ਸਕਦਾ ਉਹ ਜੋ ਵਿਚਲ ਭੋਗਾਂਗੇ ਆ ਦੇਖੋ ਜਮਰਸਾ ਕੀ ਕਹਿੰਦਾ ਕੇ ਗਾਂਢ ਨਹੀਂ ਇਹ ਪਰਮੇਸ਼ਰ ਨਾਲ ਟੁੱਟੀ ਜਾਂਦਾ ਸੰਗ ਮੈਂ ਜਮਰਸਾ ਆ ਜੋ ਜਿਹਨਾਂ ਕਢੌੜੀਆਂ ਆ ਕਾ ਜੀ ਵਾ ਗਰ ਰੰਗ ਨਾ ਨਾਲੇ 6 ਬਨੇ ਹੈ ਜੀ ਜਦ ਨਾ ਜਿਬੋ ਹੋ ਕੇ ਤੁਨੂੰ ਤੋਪਾ ਲਾਉਂ ਜੋੜੂਗਾ ਰੱਬ ਵੀ ਵੇ ਹੈ ਮੈਂ ਤੁਨੂੰ ਥੋੜਾ ਬੋਦਾ ਫਟ ਕਰੂਗਾ ਜੇ ਢੋਲ ਨੂੰ ਕੋ ਚਾਹ ਰੱਬ ਵੀ ਆਦਾ ਇਸਤੇ ਕਰਦਾ ਹੈ ਕੱਟ ਦੂਗਾ ਫਿਰ ਵੀ ਉਹ ਕਦੋਂ ਥੋੜੀ ਗੱਲ ਕਹਿਣਾ ਜਿਪਣਾ ਜਿਪੋ ਕਰੀਏ ਉੱਥੇ ਸਮਾਂ ਆ ਪੰਡਿਤ ਬਹਿ ਕੇ ਪ੍ਰਚਾਰ ਕਰਦੇ ਗੁਰੂ ਗੱਲ ਨੂੰ ਦਾ ਬਲੋ ਕਹਾਂ ਐ ਜੀ ਨਾ ਜਾਵੇ ਸਨੇਹਾ ਬਰੋਤੇ ਦੇ ਯੋਥਨ ਰਮਦਾਸ ਦੇ ਘਲਾਬਾ ਕਰਦਾ ਸੀ ਮੁਰਤੀ ਬਣਾਤੀ ਉਹ ਵੀ ਉਸ ਦੀ ਮੁਰਤੀ ਬਣਾਉਣੀ ਚਾਹੀਦੀ ਹੈ ਤੇ ਬੜੇ ਸਾਧੂ ਦੀ ਮੋਹ ਦੀ ਨਹੀਂ ਨਹੀਂ ਕੋਈ ਜੋ ਜੋ ਜਪੇ ਇਸ ਤ੍ਰਿ ਗਤੀ ਹੋਏ ਜੋ ਜੋ ਜਪੇ ਇਸ ਕੀ ਗਤ ਹੋਏ ਸਾਧ ਸੰਗ ਪਾਣਦਾ ਉਹਦੀ ਫੁੱਦੀ ਛਪਣ ਦਾ ਸ਼ਾਸਤਰ ਉੱਤੇ ਵਰਤਿਆ ਬੇਹਜ਼ਾਲੀ ਨੇ ਛੱਪੜਾ ਪੜਾਤੀਆਂ ਗਤੀ ਕਰਤੀ ਪਾਣੀ ਜਿਹੜਾ ਛੱਪੜਦਾ ਉਹ ਸਹੀ ਆ ਬਸ ਛੱਪੜ ਗਿਆ ਉੱਥੇ ਉਹ ਛੱਪੜ ਦਾ ਪਾਣੀ ਗੱਡੀਆਂ ਉੱਥੇ ਬਗਲੇ ਆਉਂਦੇ ਨੇ ਉਹ ਬਗਲੇ ਆਉਂਦੇ ਨੇ ਫਿਰ ਉੱਥੇ ਦੱਦਾ ਭਾਲਣ ਜਾਂਦੇ ਨੇ ਕਿੰਨੀ ਤੇ ਹੋਰ ਉੱਥੇ ਕੀ ਹੋਣਾ ਹੈ ਹਾਂ ਜਦੋਂ ਜਪੈ ਤਸਕੀਕਤ ਹੋਏ ਅਗੇ ਉਹ ਸੋਬਰ ਪੰਡਤ ਜੀ ਆਪਣੇ ਸੱਜੀ ਨੂੰ ਸਾਧ ਕੇ ਬਾਨ ਨੂੰ ਸਾਧ ਕੇ ਕੋਈ ਜਦ ਐਸੇ ਵੀ ਹੁੰਦੇ ਨੇ ਪ੍ਰਾਪਤੀ ਤੋ ਤੱਕ ਵੀ ਪਹੁੰਚ ਜਾਂਦੇ ਜਿੱਦ ਫਿਰ ਲੇ ਐਸੇ ਉੱਧਰੇ ਫਿਰ ਜਦ ਸੋਫੇ ਨੇ ਜਦ ਪਾਲਣ ਨੇ ਉਹਨਾਂ ਜੋ ਬਿਰਲੇ ਐਸੇ ਨਿਕਲਦੇ ਨੇ ਉਹ ਚੁਰਿਆ ਹੀ ਜਾਂਦਾ ਫਿਰ ਵਣ ਪਿਛੇ ਨੂੰ ਨਹੀਂ ਜਾਂਦਾ ਸੱਜਿਆ ਵਣ ਪਿਛੇ ਨੂੰ ਨਹੀਂ ਜਾਂਦਾ ਉਹਦਾ ਫਿਰ ਕਹਿੰਦੇ ਇਹਦਾ ਦائیں ਜਾਂਦਾ ਤੇ ਅੱਗੇ ਹੋਏ ਸੋਏ ਪਾਛੇ ਪੌਣ ਨਾ ਦੀਜੀਏ ਅੱਗੇ ਹੋਏ ਸੋਏ ਜਿਹੜੇ ਉਹੇ ਜਾਂਦੇ ਨੇ ਅੱਗੇ ਹੋਏ ਸੋਏ ਉਹ ਫਿਰ ਵਾਂਗ ਆਪਣੇ ਸੱਜ ਖੜ ਦੇ ਆਪਣੇ ਘਰੇ ਜਾਵੜ ਨੇ ਹਾਂ ਕਿਰਪਾ ਅੰਤਰ ਉਲਟਾਰੇ ਪਸ਼ੂ ਤ੍ਰੇਦ ਮੁਗਧ ਪਥਰ ਕੋ ਕਿਰਪਾ ਅੰਤਰ ਉਲਟਾਰੇ ਜਿਸੇ ਕਿਰਪਾ ਕਰਦੰਦਾ ਹੈ ਅਦੇ ਹੱਦੈ ਜੀ ਪਸਾਦੰਦਾ ਉਹ ਅੰਤਰ ਉਲਟਾਰੇ ਪਸ਼ੂ ਤ੍ਰੇਦ ਮੁਗਧ ਪਥਰ ਕੋ ਤਾਰੇ ਮੁਗਧ ਪਥਰ ਕਿਹਾ ਜਾਵੇ ਹੋਵੇ ਤਾਂ ਜਦ ਹਾਂ ਜਿਸੇ ਕਿਰਪਾ ਕਰਦਾ ਪ੍ਰਭੂ ਆ ਮਰਜੇ ਗਿਆਨ ਔਰ ਉਹ ਲਗਵੇਂ ਮੰਦਰ ਦੇ ਵਿੱਚ ਪਸਾਰ ਇਹਨੂੰ ਬਿਲੇ ਜੇ ਕਿਸੇ ਨੂੰ ਘਾਣੋਂ ਮਿਲ ਜਵੇ ਉਹ ਹਜਮ ਕਰ ਲਵੇਗਾ ਮੇਰੇ ਕੋ ਖਾਵੇਗਾ ਉਹ ਪੁੱਛਿਆ ਇਹ ਉਹ ਹਜਮ ਕਰ ਲਵੇ ਕਿਰਪਾ ਨਾਲ ਤੈਨੂੰ ਕਰੀ ਸੀ ਫਿਰ ਉਹ ਹਜਮ ਕਰ ਲਵੇ ਹਜਮ ਕਰ ਸੋ ਤੇ ਅਪਣੀ ਕਰਦਾ ਉਹਨੂੰ ਆਪਣੀ ਕਰਦਾ ਤੇਨ ਜੋ ਦੀ ਕਰਦਾ ਤੇਨ ਜੋ ਉਦੀ ਕਰਦਾ ਤਾਲ ਮਿਲ ਤਾਲ ਮਿਲ ਕਰਾਉਣ ਚ ਉਹਦੀ ਦਸਤ ਪਰਮੇਸ਼ਰ ਦੀ ਕਰ ਜੋੜ ਮਿਲ ਕਰਾਉ ਕਿਵੇਂ ਪਹੁੰਚਿਆ ਉੱਥੇ ਤੱਕ ਸਰੋਵਰ ਤੱਕ ਪਾਣੀ ਜੋੜਦਾ ਸਰਦਾ ਪਾਣੀ ਜੋੜਦਾ ਸਰਦਾ ਜੰਡਰ ਚ ਪਿਆਸਾ ਕਦੇ ਕਹਿੰਦਾ ਇਹਨੂੰ ਜਾਵਾ ਕਦੇ ਕਹਿੰਦਾ ਇਹਨੂੰ ਜਾਵਾ ਕਦੇ ਕਹਿੰਦਾ ਇਹਨੂੰ ਜਾਵਾ ਜਰੀ ਦਾ ਮੱਥ ਕਿਤੇ ਨਹੀਂ ਪਤਨ ਆ ਨਾ ਨਾ ਜਲਦਾ ਉਹ ਤੁਨ ਜੰਦਾ ਉਧਰ ਪਾਣੀ ਕਿਰ ਜਾਂਦਾ ਤੇ ਇਹ ਦਿੱਤਾ ਜਿਹਦਾ ਫੈਸਲਾ ਕਰਾਇਆ ਕਿ ਆਏ ਨੂੰ ਜਲਿਆਗਾ ਅਨੇਲੇ ਜੇ ਪਾਣੀ ਹੁਣ ਇਹ ਤਾਂ ਉਹਦੀ ਕਿਰਪਾ ਇਹ ਹੋ ਗਿਆ ਸੰਯੋਗ ਪਾਣੀ ਦਾ ਮਿਲ ਗਿਆ ਤਾਂ ਠੀਕ ਹੈ ਜੇ ਹੱਲ ਕਰ ਲਵੇ ਅਸਰ ਹੋ ਗਿਆ ਲਣਾ ਮੈਂ ਹਰਿ ਚੱਲੀ ਚੱਲ ਅਜ ਮਾਗੀ ਨਾਲ ਗੱਲ ਨਹੀਂ ਆਈ ਉਹ ਕਾਹ ਮੋਰ ਸੀ ਕੋਈ ਨਾ ਚਲੇ ਗਿਆ ਲੈਣਾ ਕੇ ਉਹਨੇ ਹਜ ਨਹੀਂ ਆਈ ਗੇ ਲੋਕਰ ਉੱਥੇ ਚਲੇ ਗਏ ਸਭ ਖਾਧੀ ਵੀ ਲਿਆ ਪਰ ਨਹੀਂ ਆਈ ਤਾਂ ਮੈਂ ਜਿਹਦੇ ਹਜ ਮਾਗੀ ਕਿਰਪਾ ਦਾ ਸਾਰਿਆਂ ਤੇ ਹੋਏ ਸੀ ਪਰਮੇਸ਼ਰ ਦੀ ਸਾਰੇ ਚਲੇ ਗਏ ਤੇ ਲੈ ਨਾਲ ਦੀ ਸੰਗਤ ਪਰ ਆਪਣੀ ਕਿਰਪਾ ਆਪ ਆਪਣੇ ਤੇ ਨਹੀਂ ਕੀਤੀ ਆਪਣੀ ਕਿਰਪਾ ਜੇ ਸਾਥ ਕਰੇ ਆਪਣਾ ਮਨ ਇਹੋ ਜਿਹਾ ਉਹਨੇ ਆਪਣੇ ਮਨ ਨਹੀਂ ਤੂਰਿਆ ਉਹਨੇ ਮੰਦੀ ਕਰ ਮਨੈ ਨਹੀਂ ਕਿਰਪਾ ਕੀਤੀ ਤੇ ਆਪਣਾ ਮਨ ਆਤੀ ਰਹੇਗਾ ਹਾਂ ਕਸ਼ੂ ਪ੍ਰੇਤ ਪਾਤਰ ਕੋਤਾਰ ਪ੍ਰੇਤ ਕੋਤਾਰ ਕਸ਼ੂ ਪ੍ਰੇਤ ਮੁਗਧ ਪਾਤਰ ਕੋਤਾਰ ਹੀ ਹੈ ਪ੍ਰੇਤ ਨਮਸਕਾਰ ਹੋਏ ਨਾਦਰ ਖਰੀਰ ਨੂੰ ਸਮਾਜ ਦਾ ਵਿਭਾਗ ਆਪ ਨੇ ਅਜਿਹਾ ਚੌਗਾ ਚੁਣਾਇਆ ਪਸੂ ਹੀ ਹੈ। ਕਾਹਦਾ ਧਾਣਾ ਪਾਣੀ ਜੋ ਬਣਾਇਆ ਪਸੂ ਹੀ ਦਾ ਕੁਛ ਵੀ ਨੁਕਸਾਨ ਨਹੀਂ ਕੁਛ ਵੀ ਹੋਗਾ ਨਹੀਂ। ਜਿੱਦਣ ਉਹ ਇੱਕ ਸਾਲ ਹੈ ਜਾਨਾ ਕਿ ਨਾ ਪਾਣੀ ਖਾ ਜਾਣਾ। ਜਿੱਦਣ ਉਹ ਨਾ ਜਾਣਾ ਉਹਦਾ ਇੱਕ ਜਾਨ ਕਟਿਆ ਗਿਆ। ਪੈਸਾ ਘਟਿਆ ਜਾਵੇ ਪਿੱਛੋ ਘਟਿਆ ਜਾਵੇ ਕੋਈ ਨਹੀਂ ਬਰਤਦਾ ਨਾ ਉਹਨੇ ਕੋਈ ਨਾਮ ਜਪੜਾ ਨਾ ਉਹਨੇ ਕੋਈ ਕਵਾਉਣਾ ਨਾ ਉਹਨੇ ਕੋਈ ਕਵਾਉਣਾ ਉਹਦਾ ਭਾਣੇ ਚੱਲਦਾ ਢਿੱਡ ਪਰ ਤੱਕ ਹੈ ਉਹ ਜਾਨ ਹੋਰ ਕੁਝ ਨਹੀਂ ਹੈ ਇਹ ਜ્ઞાન ਕਿਉਂਦਾ ਹੈ ਜਿਹੜਾ ਕੋਈ ਨਾ ਦਾ ਪ੍ਰੇਤ ਮਾਇਆ ਦੇ ਨਾਲ ਬੋਹ ਆ ਜੀਦਾ ਉਹ ਪ੍ਰੇਤ ਦੇਖੋ ਬੰਨੇ ਪ੍ਰੇਤ ਮੁਗਦਾ ਪੱਥਰ ਬੋਦਾ ਮੁਗਦਾ ਇਹੋ ਪੱਥਰ ਹੈ ਇਹਦੇ ਅਸਰ ਦੀ ਉੱਧਾ ਪੱਥਰ ਹੈ ਜਿਵੇਂ ਪੱਥਰ ਤੇ ਪਾਣੀ ਪਾਈ ਜਾਂਦੇ ਹੈ ਪਾਣੀ ਜਾਂਦਾ ਤਾਂ ਸੁੱਕਦਾ ਸੁੱਕਾ ਬਾਹਰ ਵਿੱਚ ਪਾਣੀ ਪਾਉਂਦੇ ਹਾਂ ਜਾਨਾ ਫਿਰ ਸੁੱਕਦਾ ਹੈ ਛੇਤੀਓ ਥੋੜਾ ਜਿਹਾ ਅਸਰ ਆ ਜਾਂਦਾ ਤਬਾ ਹਾਂ ਮੁਗਦਾ ਕੋਈ ਦੀ ਬਲਬਲ ਆਉਤਰੇ ਸਪ੍ਰੇਤ ਜੋਰ ਬਲੋ ਜੋਰ ਬਲੋ ਸਪ੍ਰੇਤ ਹੈ ਤੂੰ ਜੋਰ ਲਗਾਣਾ ਹਰ ਵਾਰ ਜੀ ਵੀ ਨਾ ਹੈ ਅਕੀ ਵੀ ਨਹੀਂ ਕੋਤਾ ਜੋ ਹਰੂ ਲੈ ਨਾ ਤਾ ਸਪ੍ਰੇਤ ਨੂੰ ਜੋਨ ਬੋਗਰੀ ਜੀ ਮੁਰ ਗੜੀਓ ਜੋ ਵੀ ਮੰਦੇ ਜੋਦੋ ਜੀ ਕल्याण ਰੂਪ ਮੰਗਲ ਗੁਣ ਦਾ ਸਭ ਤੋਂ ਕਾਹ ਖਤਨਾ ਕਲਿਆਣ ਰੂਪ ਮੰਗਲ ਰੋਗ ਤਾਂ ਵੈਸੇ ਇੱਕੋ ਹੀ ਹੈ ਤੋਂ ਬਿੜ ਰੋਗਾਂ ਬਾਕੀ ਦੋ ਖੇਦ ਬਾਕੀ ਨੂੰ ਦੋ ਕਿਹਾ ਹੈ ਦੋ ਇੱਕ ਰੋਗ ਤੋਂ ਇਹਦਾ ਧੂਆ ਪੈਦਾ ਹੁੰਦਾ ਦੋਹੋਂ ਦਾ ਉਹ ਲੋਗ ਦਾ ਧੂਆ ਦੋ ਤੋਂ पूरे ਦਾ ਪੂਰਾ ਕੰਕਰ ਅੰਜਰਾ ਉਹਦਾ ਅਲਾ ਹੈ ਇਹ ਨਹੀਂ ਹੈਗਾ ਵੀ ਥੋੜਾ ਬੋਤਾ ਰਾਜ ਹੋ ਜੂਗਾ ਤਾਂ ਦਵਾਈ ਬਦਲਦੀ ਕੋਉ ਇਸ ਤਰ੍ਹਾਂ ਹੋ ਰਹੀ ਕੋਉ ਸਗਲ ਰਹੂ ਸਗਲ ਲਾਹਣ ਲੋਕ ਇੱਕ ਵਜਨ ਸਗਲ ਸਰਦ ਸਰਬ ਰੋਗ ਦਾ ਔਸ਼ਦਨਾ ਸਰਬ ਰੋਗ ਆਰੇ ਟੋਟਲ ਰੋਗ ਦਾ ਰੋਕਾਂ ਦੀ ਸਰਬ ਰੋਗ ਦਾ ਰੋਗ ਨਹੀਂ ਕਿਤੇ ਬਚਿਆ ਕਲਿਆਣ ਰੋਗ ਹੋਵੇ ਮੰਗਲ ਰੋਗ ਕੋਈ ਬਚਿਆ ਸਰਬ ਹੋਵੇ ਆ ਸਰਬ ਰੋਗ ਨੇ ਟੋਟਲ ਰੋਗ ਹੈ ਸਿਰਫ ਟੋਟਲ ਲੱਕੋ ਹੋਂਪੇਗਾ ਜਾਂਦੀ ਹੈ ਖੂਬੇ ਖੋਬੇ ਦਾ ਨੰਬਰ ਬਾਅਦ ਚਾਉਣਾ ਪਹਿਲਾਂ ਦੂਵੇ ਚਲੇ ਜਾਣਾ ਉਹਦਾ ਨੰਬਰੇ ਬਾਅਦ ਚਾਉਣਾ ਹੋਵੇਗਾ ਇਹਨਾਂ ਰੋਗ ਦਾ ਬਣਾ ਮੰਨੂਦੇ ਆਚਾਰ ਇਹ ਵੰਦੂਦੇ ਹੋਂਦ ਬਹੁ ਪਰਮ ਕਹਿ ਭਾਰ ਜਿਹੜੇ ਬਾਦ ਦੇ ਵਿੱਚ ਤ੍ਰਿਸ਼ਨਾ ਦਾ ਰੋਗ ਮੰਨੂ ਜਗੀ ਤ੍ਰਿਸ਼ਨਾ ਜਿਹੜਾ ਮੈਨ ਦਾ ਰੋਗ ਹੋ ਬੰਦੂ ਬੋ ਮੰਨੂ ਆ ਇਹ ਜਿਹੜੇ ਚਾਰ ਰੋਗ ਬੰਦੂਦੇ ਇਹ ਪੈਨਾ ਸੁਣਨੇ ਨੇ ਮੈਨ ਨਾਲ ਉਹਦੋਂ ਆਇਆ ਜੀ ਨਾ ਫੇਰ ਬੁੱਧੀ ਕਹਿੰਦੀ ਆ ਵੀ ਆਹਨ ਪੰਜਵਾ ਤੇਰੇ ਜਿਹੜੇ ਛੜਦੇ ਉਸ ਨੂੰ ਨਾ ਛੜ ਤੇ ਹਾਂ ਉਹ ਨਹਾਜਾਰ ਬਾਨੇ ਗਏ ਤੇ ਕਿੰਨੀ ਜਦੋਂ ਦਾ ਚਾਲ ਨਾ ਛੱਡੀ ਉਹਦੇ ਕੋ ਹਾਂ ਪਰ ਉਹ ਵੀ ਜਾਂਦਾ ਸੀ ਜਾਂ ਤਾ ਵੀ ਲੰਗਾ ਸੀ ਸੋਟਾ ਵੀ bindਾ ਸੀ ਸੂਟਾ ਵੀ ਲਾ ਲੰਦਾ ਸੀ ਅਦੂਆ ਸੁਲਫੈਦਾ ਮਨੇ ਥਾਰੇ ਛੜ ਤੇ ਤੇਤੇ ਕਦੀ ਛੱਡਦਾ ਉਹ ਵੀ ਜਾਂਦਾ ਸੀ ਉਹਦਾ ਨੰਬਰ ਇਹ ਵਾਚਾਉਂਦਾ ਉਹ ਸਾਰੇ ਹੀ ਰੋਗ ਹੋ ਗਿਆ ਟੁੱਟ ਇੱਥੇ ਆ ਕੇ ਰੋਗ ਕੋ ਆਪ ਜਿਹੜਾ ਹੈਗਾ ਜੜ ਤੱਕ ਦਾ ਇਲਾਜ ਹੈ ਉਹ ਰੋਗਾਂ ਵੀ ਆਇਆ ਰੋਗਾਂ ਮੇਦੇ ਤਾਂ ਐਸਾ ਦਾ ਰੋਗ ਰੋਗੋ ਤੇ ਰੋਗਾਂ ਪਾਂਸ ਉਹ ਅਸਲ ਵਿੱਚ ਉਹ ਵੀ ਚੰਚਲੇ ਬੰਦੇ ਛੱਡਿਆ ਉਹ ਵੀ ਦਾ ਇਹਦੇ ਨਾਲ ਛੱਡਿਆ ਜੇ ਬੰਦੇ ਛੱਡੇ ਨਹੀਂ ਉਹਨਾਂ ਰੋਗ ਹੈ ਵੀ ਆ ਪਾਉ ਵੀ ਤਾਂ ਇਹਦੇ ਨਾਲ ਛੱਡੇ ਹਿੰਸਾ ਨਹੀਂ ਆ ਤੇ ਜਾ ਤੇ ਹਾਂਜੀ ਸਰਬ ਰੋਗ ਕਾ ਔਖਾ ਨਾਮ ਸਰਬ ਰੋਗ ਕਾ ਔਖਾ ਨਾਮ কল্যাণ ਰੂਪ ਮੰਗਲ ਗੁਣ ਗਾਉ ਇਹਨੇ ਰੋਗ ਤੋਂ ਬਾਹਾਂ ਰੋਗ ਪੈਦਾ ਹੋ ਜਾਂਦਾ ਹੈ ਇੱਕ ਬਿਮਾਰੀ ਤੋਂ ਜਨ ਤੋਂ ਦੂਜੀ ਹੋਉਂਦਾ ਉਹਨਾਂ ਨੂੰ ਦੂਖੈਂਦ ਦੂਖ ਹੋਰ ਰੋਗ ਪੈਦਾ ਦੂਖ ਹਾਂਜੀ ਸਰਬ ਰੋਗ ਕਾ ਔਖਾ ਨੋਗ ਨਾਮ ਕਲਿਆਣ ਰੂਪ कल्याण रूप कल्याण होता ना झड़धारा हो जाता जिमे के सारे कोड होवे ना होय कोड सारे कोड एक दम हट गए कंदड़ बर्गा शरीर होय गए कुंदन बर्गा ओ कल्याण रूप काया ही पलटता है इधर आ कल्याण रूप का मन भूतियो बदलता है কল্যাণ ਹੁੰਦਾ ਬਨੁਬਦੀ ਬਦਲੇ ਤੇ ਕਲਤ ਨਾ ਬਦਲੇ ਕਲਿਆਣ ਗੂਪ ਬੰਕਲ ਗੋਣ ਦਾ ਉਹਦੇ ਬਾਅਦ ਬੰਕਲ ਗੋਣ ਨੇ ਜਿਹੜੇ ਖੁਸ਼ੀ ਦੇ ਉੱਤੋਂ ਦਾ ਖੁਸ਼ੀ ਦੇ ਖੁਸ਼ੀ ਦੇ ਨਾਲੇ ਗੋਣ ਹੁੰਦਾ ਫਿਰ ਖੁਸ਼ੀ ਨਾਲ ਖੁਸ਼ ਹੋ ਕੇ ਗੋਣ ਆਂਦਾ ਬੰਕਲ ਗੋਣ ਦਾ ਕਿਤੇ ਨਾ ਭਾਈ ਧਰਮ ਨਾਨਕ ਜਿਸ ਮਿਲੇ ਜਿਸ ਨੂੰ ਲਿਖਿਆ ਤੁਰ ਕਰ ਲਓ ਆਉ ਜੋਤ ਕੋਈ ਜੁਤੀ ਕੋਈ ਜੁਤੀ ਨਹੀਂ ਜੋ ਕੋਈ ਐਸਾ ਧਰਮ ਹੈ ਜਿਸ ਦਾ ਨਾਂ ਪ੍ਰਾਪਤੀ ਹੋਵੇ ਕਲਿਆਣ ਰੂਪ ਮੁਕਤ ਗੁਣਾਂ ਦੀ ਪ੍ਰਾਪਤੀ ਕਲਿਆਣ ਰੂਪ ਮੁਕਤ ਗੁਣਾਂ ਦੀ ਪ੍ਰਾਪਤੀ ਇਹ ਜੁਤੀ ਨਾਲ ਨਹੀਂ ਆਉਂਦੀ ਕੋਈ ਐਸਾ ਧਰਮ ਨਹੀਂ ਜਿਵੇਂ ਹੋ ਜਵੇ ਆਹੋ ਜੁਤੀ ਕਿਤੇ ਨਾ ਪਾਈਏ ਤਾਂ ਕਿਤੇ ਧਰਮ ਨਹੀਂ ਐਸਾ ਹੈ ਮਾਇਆ ਧਰਮ ਨਾਗ ਤਿਸ ਮਿਲੇ ਜਿਸ ਲਿਖਿਆ ਤੁਰ ਨਾ ਆਉਣੀਆਂ ਉਹ ਨਾਗ ਦੇ ਧਰਮ ਨਾ ਕੋਈ ਉਹ ਨਾ ਇਹ ਆ ਵੀ ਆਪ ਰਾਮਾ ਯਾਤਰਾ ਕਰਦੋ ਰਾਸੂ ਯਾਤਰਾ ਕਰਦੋ ਤੱਕ ਸੰਗ ਸੁਣ ਜੂੜਾ ਉਹ ਇਹ ਕਹਿੰਦੇ ਨੇ ਜਿਹਨੂੰ ਨਾਦ ਸੁਣ ਉਹ ਸਮਝੋ ਕੁਝ ਨਹੀਂ ਹੋ ਜਾਏਗਾ ਆਹ ਆਹ ਬਸ ਹਾਂ ਉਹਦਾ ਜੀ